ਲੋਭ ਕਾਮ ਕ੍ਰੋਧ ਅਰ ਲੋਭ ਵੋ ਬਿਨਸੇ ਜਾਏ ਅਹਮੇਵ ਬਿਨਸੇ ਜਾਏ ਅਹਮੇਵ ਬਿਨਸੇ ਜਾਏ ਅਹਮੇਵ ਨਾਨਕ ਪ੍ਰਭ ਸੁਨਾਗਤੀ ਕਰ ਪ੍ਰਸਾਦ ਗੁਰਦੇ ਕਾਮ ਕ੍ਰੋਧਾ ਲੋਭੋ ਚਾਰ ਕਰਤੇ ਇੱਕ ਪਾਸੇ ਅਹਮੇਵ ਕਰਦਾ ਇੱਕ ਪਾਸੇ ਇਹ ਚਾਰੇ ਮਾਨਸ ਮੰਨ ਤੋ ਸਮਝੋ ਤਮ ਕਾਮ ਕ੍ਰੋਧਾ ਲੋਭੋ ਕ੍ਰੋਧ ਹੈ ਹੋਣੀ ਹੈ ਸੋਚ ਉਹ ਬੇਵਾਬ ਹੋਦਰ ਮਾਤਿਕ ਰੋਧ ਹੈ ਉਹ ਬੇਵਿਦੀ ਹੈ ਸੋ ਵਿੱਚ ਆਇਆ ਉਹ ਤਾਂ ਉਹ ਕੋਲ ਹੈ ਉਹਨੇ ਉਹ ਰੱਖਿਆ ਆਪਣਾ ਜਿਵੇਂ ਸੱਚੇ ਨੇ ਆਕਾਸ਼ ਰੱਖਿਆ ਪਪਣਾ ਛੱਡਿਆ ਉਹਨੇ ਹੌ ਨਹੀਂ ਦਿੱਤਾ ਵਿਚਾਰੇ ਰੁੱਤੇ ਨੇ ਚਾਰ ਮੰਨਣੇ ਚਾਹਤ ਚਾਹਤ ਤਾਂ ਮੰਨੂ ਬੱਡੀ ਬਾਵਰ ਆਪਣੀ ਰੱਖੀ ਹੈ ਬੀਟੋ ਬਾਵਰ ਦਾ ਕਹ ਮੇ ਬਾੜੀ ਮਾਰ ਬੁੱਤੀ ਨਹੀਂ ਬੰਨਣਾ ਉਹਨੇ ਕੇ ਨਾ ਵੜ ਦਰੂ ਦੇ ਬੀਟੋ ਵੜ ਚਾਰੇ ਵਜੇ ਨਿਕਲੇ ਨਾ ਫੇਰ ਵੀ ਉਹ ਹੈਗਾ ਪੰਜੇ ਪਰਮਜੋ ਨਿਕਲੇ ਨਾ ਫੇਰ ਵੀ ਪਰਮ ਹੈਗਾ ਪੰਜੇ ਪਰਮਜੋ ਦਾ ਵਾਦਾ ਹੈ ਜੀ ਇਹ ਚਾਰ ਹੋ ਜੋ ਪੈਦਾ ਹੋਇਆ ਹੋ ਜੋ ਪੈਦਾ ਹੋਇਆ ਠੀਕ ਆ ਗੱਲ ਕੱਲੀ ਹੋਮੇ ਬੁਝੇ ਤਾਂ ਦਾ ਦੂਜੇ ਕੱਲੀ ਹੋਮੇ ਲੈਣ ਹਾਂ ਹੋ ਤਾਂ ਪਤਾ ਹੀ ਐ ਇਹ ਤਾਂ ਆਪਣੇ ਕੋਲੇ ਨੇ ਜੀ ਚੈਰੀਓ ਜੇ ਵੀ ਚੀਜ਼ ਆ ਉਹਦਾ ਕੀ ਬੁਝਣ ਵਿਰੋਧ ਵੀ ਹੈਗਾ ਸਾਰੇ ਬੁੱਧ ਦੇ ਹੈਗਾ ਸਾਰੇ ਬੁੱਧ ਦੇ ਇਹ ਫਰਗਦਰ ਜੀ ਜਾਣਿਆ ਰਹੇ। ਸ਼ਾਮਨਾ ਹੈ ਕਿ ਸਾਰੇ ਮੰਦਰ ਨੇ। ਉਹ ਵੀ ਸਾਡੇ ਮੰਦਰ ਨੇ। ਜੇ ਨਹੀਂ ਮੰਨਦਾ ਤਾਂ ਅਕਾਲੂ ਨਹੀਂ ਮੰਨਦਾ ਕੋਤੇ ਹੈ। ਇਹ ਬੜੀ ਪਾਵਰ ਹੈ। ਸਤਾਰਾ ਹੈ। ਇਹ ਸਿੱਖ ਹੈ, ਪੂਰੀ ਫੌਜ ਹੈ ਲੜਨ ਵਾਲੀ ਦੀ। ਫਿਰ ਉਹ ਲੈਣਾ ਕਰਕੇ ਜਹਕਾਲ ਦੇ ਚੋੜ ਪੈਦੀ ਹੈ। ਜੇ ਕਹਕਾਰ ਨੂੰ ਪੱਠੇ ਪੈਦਿਆਂ ਨੇ ਫਿਰ ਤਾਂ ਠੀਕ ਹੈ ਜੇ ਕਹਕਾਰ ਨੂੰ ਛੱਡਵਾਤੀ ਹੈ ਫਿਰ ਕਰੋਧ ਹੁੰਦਾ ਹੈ ਕਰੋਧ ਪ੍ਰਦਾਨ ਬਟੋਵਾ ਤੁੰਤ ਸਰਪਨ ਮਹਾਬਾਸੀ ਰਾਜਾ ਉਹ ਰਾਜਾ ਹੈ ਦਰਵਾਲਾ ਦਰਵਾਲਾ ਰਾਜਾ ਬਾਹਰ ਵਾਲਾ ਕਾਨੂੰ ਬਾਹਰ ਵਾਲਾ ਦਾ ਕਰੋਧ ਕਰਾ ਦੇਇਆ ਹੈ ਉਹ ਰਾਜਾ ਦਰਵਾਲਾ ਨਹੀਂ ਬੈਠਾ ਹੁਣ ਉਹਦੇ ਕੋਲ ਹੈ ਕੋਈ ਹੰਸ ਸਹਿਬ ਰੋਚੈ ਸੰਸ ਬਟਾ ਆਇਆ ਹੈ ਬਲੋ ਚਿੱਕ ਕੋਈਆ ਕੈਨਸਲ ਕਰ ਦੋ ਜਾਈ ਦੋ ਤਾਂ ਬਣ ਗਏ ਬੰਦ ਬੋ ਰਸੀ ਰਾਜਾ ਬੰਦੀ ਜੋੜ ਕੀ ਜਾਣੀ ਰੀਤ ਪਤਾ ਲੱਗੂ ਦਹੀਂਗਾ ਚਾਰ ਪਾਸੇ ਕਰਦਾ ਇੱਕ ਪਾਸੇ ਕਰਦਾ ਇੱਕ ਬੜਾ ਚਾਰ ਕਰ ਲਓ ਜਾਂ ਚਾਰ ਬੜਾ ਕਰ ਲਓ ਕਾਮ ਕਰੋਧ ਔਰ ਲੋਭ ਵੋ ਬਿਨਸ ਜਾਏ ਅਹ ਮੇਵ ਇਹ ਤਾਂ ਜਾਣ ਲਗੇ ਜਾਂ ਹੰਕਾਰ ਵਿਸਰਜੂਗ ਨਹੀਂ ਜਾਣਦੇ ਕਦੇ ਮੇਵ ਨੂੰ ਲੱਗਿਆ ਚਾਰਾ ਨਾਲ ਨਹੀਂ ਲੱਗਿਆ ਹਾਂ ਜਗਾਂਤ ਬਦਲਣਾ ਪਰ ਉਹ ਵੀ ਚਾਹੀਦਾ ਲੋਭ ਨਹੀਂ ਜਗਾਣਾ ਫਿਰਾਲ ਜੇ ਗੁਣ ਤੋਂ ਜ਼ਰੂਰ ਉਹ ਤਾਂ ਥੋਤਾ ਬਦਲਣਾ ਉਹ ਤਾਂ ਆਇਆ ਦੀ ਕੁਛ ਲੈਣ ਉਹ ਤਾਂ ਚਾਰੇ ਪੰਡੇ ਠੀਕੇ ਸੀਗੇ ਪਾਉਣੇ ਕੁਛ ਹੋਰ ਲੱਗ ਗਿਆ ਆਪਣਾ ਕਾਦੀ ਕਰਨੀ ਸੀ ਆਪਣਾ ਵਾਇਦੀ ਕਰਨ ਲੱਗ ਗਿਆ ਭਾਵਨਾ ਭੁੱਖੇ ਆ ਸੱਚ ਨਾਮ ਦੀ ਗੱਲ ਨਾਲਦਾ ਉਹ ਨਾਮ ਦੀ ਇੱਛਾ ਛੱਡ ਕੇ ਭੁੱਖ ਛੱਡ ਕੇ ਉਹ ਆ ਦੀ ਗੱਲ ਲੱਗ ਗਿਆ ਇੱਛਾ ਅੰਨੀ ਭੁੱਖੇ ਮਾਇਆ ਦੇ ਨੂੰ ਭਾਵਨਾ ਰਹਿੰਦਾ ਜੀ ਆਪਣਾ ਅਧੀਨ ਹੈ ਤੂੰ ਕੋ ਕੋ ਸੈ ਦੀ ਜੀ ਵਿਸਾਇਆ ਕਾਉਂਦਾ ਜੀ ਨੋ ਮਹਾਂਤਿਆਂ ਦੀ ਨੋਗੀ ਪੁੱਤੀ ਬੋਦੀਆਂ ਅਜਨੀ ਮਾਇਆ ਦੇ ਮਾਇਆ ਦੇ ਜੀ ਸ਼ਰੀਰ ਦੀਆਂ ਲੋੜਾਂ ਦੇ ਬਾਹਲੇ ਸ਼ਰੀਰ ਦੀਆਂ ਲੋੜਾਂ ਦੇ ਜੀ ਕਾਮ ਕ੍ਰੋਧਾ ਲੋਭੋ ਵਿਰਤ ਜਾਏ ਤਬ ਨੇ ਤਾਂ ਮੈਵ ਦਾ ਪ੍ਰਾਪਤ ਹੈ ਉਹ ਤਾਂ ਫਿਰ ਦੋਦੇ ਅੰਦਰ ਹੈ ਗਿਆਨ ਦੇ ਪ੍ਰਾਪਤ ਨਾ ਕੋ ਪ੍ਰਾਪਤ ਇਹ ਨਾਨਕ ਪ੍ਰਭੂ ਸਿਮਾਗਦੀ ਆਇਆ ਵੀ ਤੂੰ ਹਾਂ ਛੱਡ ਦੇ ਕਰ ਪ੍ਰਸਾਦ ਵੀ ਕਿਰਪਾ ਕਰਕੇ ਦੂਰ ਹੋ ਜਾਣ ਲੈ ਨਾਨਕ ਪ੍ਰਭੂ ਸਮਾਗਦੀ ਪ੍ਰਸਾਦ ਬੁਦਰੇ ਤੁਸੀਂ ਸੋ ਕੀ ਕਰੋਗੇ ਸਭ ਲੋ ਹੈ ਹਾਂ ਹਾਂ ਹਾਂ ਹਾਂ ਹਾਂ ਹਾਂ ਉਹ ਆਪ ਕੈਂਚੇ ਨਾ ਆਇਆ ਵੀ ਉਹਦੇ ਚ ਹੋਂ ਹੈ ਉਹਦੇ ਚ ਮੈਂ ਆਏ ਪਰ ਗੱਲ ਉਹ ਬੋਲਦੇ ਕਹਿੰਦੇ ਆ ਵੀ ਤੂੰ ਛੱਡ ਲੜਾਈ ਦਵਾਂ ਕੋਈ ਨਾ ਆਪਣੇ ਘਰ ਵਾਲੇ ਨੂੰ ਵੀ ਤੂੰ ਕਾ ਇਹਦੇ ਨਾਲ ਜਿੱਦਾਂ ਮੁੰਡੇ ਨਾਲ ਜੇ ਤੂੰ ਛੱਡ ਦੇ ਜਿਦਾਂ ਹੀ ਆ ਫੇਰ ਦੂਗੀ ਕੋਈ ਇਹ ਤਾਂ ਉਹ ਬੰਦਾ ਉਲਟਾ ਜ਼ੋਰ ਪਾਉਣ ਨੂੰ ਆਹ ਵਸ ਵਸ ਹੋ ਗਿਆ ਉਹ ਕਹਿੰਦੇ ਵੀ ਤੂੰ ਝੜਦੇ ਮੇਰੇ ਨਾਲ ਝੜਨੇ ਆ ਇਹ ਇੱਕ ਮੈਂ ਝੜ ਦੂਗਾ ਸੇਖਦਾ ਇੱਥੋਂ ਹੀ ਆਉਂਦਾ ਬਾਕੀ ਲੋਭ ਉਹ ਭੋਲੂ ਆਪਾਂ ਨੇ ਪ੍ਰੇਮ ਚ ਬਦਲ ਲੈਣਾ ਜੇ ਉਹ ਝੜਦੇ ਆਪਣਾ ਬੇਜਰੇ ਦਰੇਗੇ ਆ ਪੈਦਾ ਉਹ ਝੜਦੀ ਹੈ ਫਿਰ ਕਿਵੇਂ ਕਹਾਂਗੇ ਆਪਾਂ ਕਿਹੜੀ ਹਣਾ ਉਹ ਮਾਇਆ ਦਾ ਨਿਰਖਣਾ ਪ੍ਰੇਮ ਕਰਦੈ ਉਹਦਾ ਨਵੇਂ ਬਦਲਦਾ ਉਹ ਜਿਹਨੇ ਮਾਇਆ ਉਹ ਤੋਂ ਖਬਾਰੀ ਗਿਆ ਉਹ ਮਾਇਆ ਦਾ ਮੋਹ ਇਹਨੋਂ ਹੋਰ ਦਾ ਮੋਹ ਨਾਲੋਂ ਪ੍ਰੇਮ ਸਿੱਖ ਬਣਾ ਦਿੰਦਾ ਜਾਂ ਪ੍ਰੇਮ ਪ੍ਰਕਾਸ਼ ਬਣਾ ਦਿੰਦਾ ਮੋਹ ਨਾਲ ਦਾ ਪ੍ਰੇਮ ਪ੍ਰਕਾਸ਼ ਬਣਾਤਾ ਚਲ ਗੱਲ ਖਤਮ ਹੋਈ ਬਦਲਦਾ ਉਹ ਜਾਂ ਨਵੇਂ ਬਦਲੇਆ ਨਾਲੇ ਪ੍ਰੇਮ ਉਹਗਾ ਨਾਲੇ ਪ੍ਰਕਾਸ਼ ਹੋ ਗਿਆ ਪ੍ਰੇਮ ਪ੍ਰਕਾਸ਼ ਬਣਾ ਦੈਣ ਆਪਾਂ ਨੇ ਵੱਦਦਾਦਾ ਹੋਈਆ ਬਤਾ ਨਹੀਂ ਬੱਲੇ ਨਾ ਉਹ ਵਧਲਣਾ ਕੋ ਮੋਹਲਾ ਆਦਿਕਾ ਨਾ ਪ੍ਰੇਮ ਪ੍ਰਗਾਜ ਆਜਾ ਤੇ ਤੇਰਾ ਅੰਮ੍ਰਿਤ ਅੱਗ ਲੱਗ ਕੇ ਖਤਮ ਹੋਈ ਵੱਦਦਾਦਾ ਹੋਈਆ ਕਹਿੰਦੇ ਪ੍ਰੇਮ ਪ੍ਰਗਾਜ ਆ ਜਾਣ ਦੋ ਸੱਜਣ ਵਾਲੇ ਕਹਿੰਦੇ ਹਾਂ ਕਹਿੰਦੇ ਕੀ ਨਾ ਪ੍ਰੇਮ ਪ੍ਰਗਾਜ ਕਹਿੰਦੇ ਆ ਜਾ ਫੇ ਠੀਕ ਹੈ ਮੋਹਨ ਲਾਲ ਨੂੰ ਨੇ ਆਉਣ ਦੱਸ ਉਹ ਤਾਂ ਇੱਧਰ ਹੀ ਹੈ ਕਹਿਵੇ ਬੇਕ ਬੋਧੀ ਦੇ ਵਿੱਚ ਅਭਵੇਤ ਨਾ ਉਹਦੇ ਵਿੱਚ ਅਭਵੇਤ ਨਾ ਉਹਦੇ ਵਿੱਚ ਰਹੇ ਛੁਪਿਆ ਹੋਇਆ ਇਹਦੇ ਰੋਲ ਲੋਕੀਏ ਨਾ ਜਦੋਂ ਤੱਕ ਮੈਂ ਨਹੀਂ ਨਾਮਾਂ ਕਹਿੰਦਾ ਰਿਹਾ ਜਦੋਂ ਤੱਕ ਦਿੱਤਾ ਉਹ ਪ੍ਰੇ ਉਬੋਧੀ ਵੀ ਕੋਈ ਗੱਲ ਪ੍ਰੇਵਗਾ ਗ੍ਰੋਧਾ ਗ੍ਰੋਧ ਨੂੰ ਵੀਰਾਸੇ ਪਕੜਨਾ ਕਾਇਆ ਸਾਧਿਆ ਮਨ ਕਬੂਰ ਉਤਰਨਾ ਜਲਦੀ ਲੋੜ ਦੀ ਡਰਾਂਗੇ ਨਾ ਉਗੜਾਂਗੇ ਰੜਾਂਗੇ ਕਬੂ ਜਲਦੀ ਲੋੜ ਦੀ ਜੇ ਪਾਇ ਹੋ ਜੋ ਹੋਏ ਭਜੋ ભગવાન ਦਰਵਾਜ਼ਾ ਕਾਇਰਦਾ ਦੱਦੇ ਡਰਦੇ ਤਾਂ ਕਹ ਕਹੂੰ ਕੋ ਦੇਖਣਾ ਨਹੀਂ ਪਾਇ ਬਸ ਆਣਾ जे पै हटाई ताही ओ दंद खटे कीते मैं तो बोल रहा दे वही बदले सी इथे वो बदेदारी बदले बदे तो वही ने बन्दे वही ने पै जकती पै जकती पै दे दी सी ओके आम साने पै भी सत्ता सी ओ बन्दा तो जे गोवंदर रहे तो गोवंदर सिंह हो गया बन्दा उतना बदेया तो ਦੈਰ ਹੌਸਾ ਉਹ ਅੰਤਲਾ ਬਦਲਿਆ ਬਾਹਰੋਂ ਨਹੀਂ ਮੰਦਾ ਬਦਲਿਆ ਅੰਦਰ ਪਰ ਬਰਤੰ ਅੰਦਰ ਹੋਇਆ ਪਰ ਬਰਤੰ ਹਾਂ ਜੀਵਨ ਹੋਈ ਹੈ ਸਹੀ ਹੋ ਆਤਮਿਕ ਲੈਵਲ ਤੇ ਪਰਵਰਤਨ ਹੋਇਆ ਸ਼ਰੀਰਿਕ ਲੈਵਲ ਤੇ ਪਰਵਰਤਨ ਨਹੀਂ ਹੋਇਆ ਕਾਮ ਕ੍ਰੋਧ আর ਕੋਈ ਮੇਰਾ ਜੋ ਇਹਨਾਂ ਦੇ ਰੋਏ ਗਲਤ ਰੱਖੇ ਹੋਏ ਨੇ ਇਹਦਾ ਨਵਾਂ ਦਾ ਹੀ ਫਰਕ ਹੈ ਇਹਨਾਂ ਦੀ ਕੋਈ ਵੀ ਗੱਲ ਨਹੀਂ ਤੇ ਸਾਧ ਰੰਤ ਵੀ ਹੈ ਗਿਆ ਰਿਸ਼ਤੇਦਾਰੀਆਂ ਹੈ ਸਭ ਕੋ ਮੀਟਾ ਹਮ ਆਪਣੀ ਕੀ ਦੋਈ ਦਾ ਫੇਲੋੜ ਪੈਣੀ ਹੈ ਇਹ ਤਾਂ ਫੇਲੋੜ ਪੈਣੀ ਮੋਹ ਦੀ ਕੋਈ ਤਾਂ ਰੋਡ ਪੈਣੀ ਹੈ ਤੁਸੀਂ ਤਾਂ ਜੇ ਬਿਚੈ ਨਹੀਂ ਬਰੋਂ ਆਪਾਂ ਹਾਂ ਜੀ ਜਦੋਂ ਆਇਆ ਹਮ ਐ ਮੈਂ ਵੀ ਨਹੀਂ ਰਹਿਣਗਾ ਕੋਈ ਇਹਦਾ ਨਾਮ ਨਾਲ ਵਿਰੋਧ ਹੈ। ਆਪਾਂ ਨਾਵਾਂ ਨਾਲ। ਕੀ ਬਾਕੀ ਨੇ ਇਹਨਾਂ ਨੂੰ ਬਦਲ ਦੇਣੇ। ਉਹ ਗਿਆਨ ਨਾਲ ਬਦਲ ਜਾਣੇ ਨੇ। ਬਾਕੀ ਸਭ ਲੋੜਾਂ ਨੇ ਠੀਕ ਨੇ ਜੀ। ਬਾਕੀ ਕੋਈ ਨਹੀਂ ਗਲਤ ਹੈ। ਸਹੀ ਮੈਂ ਤਾਂ ਬੇਵਕੂਫ਼ ਹਾਂ ਉਹ ਗਾ ਉਹ ਰੇ ਨਾ ਜੜ ਗਈ ਹਾਂ ਜਿਹੜੀ ਮਾਂ ਬੈਠੀ ਆ ਉਹਦੇ ਦੀ ਸਰਮਤਾ ਹਾਂ ਜੀ ਨਾਨਕ ਪ੍ਰਭ ਸਰਨਾਗਤੇ ਕਰ ਪ੍ਰਸਾਦ ਗੁਰਦੇ ਨਾਨਕ ਪ੍ਰਭ ਨਾਨਾ ਜੀ ਤਾਂ ਦਾ ਨਾਨਕ ਮੈਂ ਲਿਆਦਾ ਤੇਰੇ ਕੋਲ ਬਣਾ ਕੇ ਬੁੱਧੀ ਕਹਦੀ ਹੈ ਆਦਾ ਪਾਤਾ ਤੇਰੇ ਵਿੱਚ ਚੱਲਦੀ ਤਾਂ ਛੱਡ ਗਿਆ ਤੇਰੇ ਨਾਲ ਛੱਡ ਤੂ ਕਰਪਾ ਤੂ ਕਰਪਾ ਸਰ ਤੂੰ ਛੱਡੋ ਕਿਉਂਕਿ ਉਹਦਾ ਕਰਪਾਈ ਕਹਿ ਸਕਦੇ ਹਾਂ ਅ ਸਰ ਕਰਪਾ ਸੋ ਹਰ ਜਨ ਪੈ ਗਿਆ ਕੋਈ ਗਾਵਾ ਸਤਗੁਰ ਕੇ ਸਤਗੁਰ ਦੀ ਝੂਠੀ ਹੈ ਤੂੰ ਕਰਪਾ ਕਰ ਅਸ਼ਟਪਦੀ ਅੰਮ੍ਰਿਤ ਖਾਏ ਜੀ ਆਓ ਪ੍ਰਸਾਦਾ ਜੈਨਾ ਵਰਤ ਪ੍ਰਸਾਦ ਦੁਆਰੇ ਆਉਂਦੇ ਤੇ ਕਿਰਪਾ ਸਦੀ ਕਿਰਪਾ ਕਰ ਨੌਣੇ ਤੇ ਉਹ ਕਿਰਪਾ ਦੀ ਕਰ ਉਹ ਗੁਰਪ੍ਰਸਾਦ ਨਹੀਂ ਆ ਉਹ ਗੁਰਪ੍ਰਸਾਦ ਕਿਰਪਾ ਤੇ ਪ੍ਰਸਾਦ ਕਰ ਗੁਰਪ੍ਰਸਾਦ ਹੈ ਗੁਰਪ੍ਰਸਾਦ ਕਰ ਪ੍ਰਸਾਦ ਗੁਰਦੇਵ ਹੈ ਗੁਰਦੇਵ ਨੇ ਦਾ ਪ੍ਰਸਾਦ ਕਰਨਾ ਉਹ ਗੁਰਪ੍ਰਸਾਦ ਕੋਲ ਨਾਲੇ ਵਿੱਚ ਲੱਗਿਆ ਹੈ ਦੇਵ ਘਟਿਆ ਹੈ ਉਹ ਗੁਰਦੇਵ ਪ੍ਰਸਾਦ ਗੁਰਦੇਵ ਗੁਰਪ੍ਰਸਾਦ ਹੈ ਕੁ ਸਤਪੁਰਤੋਂ ਮਿਲਿਆ ਹੋਇਆ ਪ੍ਰਸਾਦ ਗੁਰਪ੍ਰਸਾਦ ਦਾ ਜਪ ਕੇ ਪਾਣਾ ਕਰਨਾ ਤੂੰ ਖੇਰ ਕਰ ਗੁਰਦੇਵ ਨੂੰ ਸੰਬੋਧਨ ਹੈ ਇਹ ਤੇ ਗੁਰਦੇਸ ਹੱਬੜੇ ਖੜਾ ਹੈ ਉਹ ਗੱਲ ਹੋ ਰਿਹਾ ਉਹ ਕਿਸੇ ਨੂੰ ਦੱਸ ਰਿਹਾ ਵੀ ਗੁਰਦੇ ਉਹਦੇ ਪ੍ਰਸ਼ਾਦ ਤੇ ਉਹ ਤੇ ਗੁਰਦੇ ਥੋੜੀ ਖੜਾ ਇਹ ਤੇ ਗੁਰਦੇਬ ਨਾਲ ਤਾਂ ਗੱਲੇ ਹੋ ਰਹੀ ਹੈ ਇਹ ਤਾਂ ਗੱਲ ਸੁਣੀ ਮਤਲਬ ਨੂੰ ਵੀ ਹੋਂਮੀ ਹੁੰਦੀ ਪਹਿਲੀ ਗੱਲ ਤਾਂ ਇਹੀ ਕਿਦੇ ਗੱਲੇ ਥੱਲੇ ਤੋਂ ਨਹੀਂ ਇਹ ਤਾਂ ਹੋਣਾ ਵੀ ਨੂੰ ਹੀ ਹੰਕਾਰ ਹੈ ਕੋ ਧਾਬੇ ਤੋਂ ਉਹ ਰਹੇ ਸਤਗੁਰੂ ਨੇ ਆ ਗੁਰਦੇਵ ਨੂੰ ਗੁਰਦੇਵ ਜੇਵ ਜਨ ਦਾ ਹੈ ਉਹ ਭਾਈ ਆਜਾ ਮਾਨਿਕੋ ਪੈਦਾ ਕੀਤਾ ਯੂਗੁਰਦੇ ਬਾਦਚਾ ਮੇਰੇ ਸ੍ਰੀ ਗੁਰਦੇ ਬਾਦਚਾ ਹਾਂ ਅਰੇ ਯਾਰ ਜੀ ਅਸ਼ਟਪਦੀ ਜੀ ਪਾਣੀ ਇਹ ਬੋਤਲ ਪਾਣੀ ਖੰਦੇ ਨੀ ਪਈਏ ਜੈ ਪ੍ਰਸਾਦ ਸ਼ਕਤੀ ਅਮਰਦ ਖਾਏ ਜੈ ਪ੍ਰਸਾਦ ਛੱਤੀਆ ਪਰਤ ਖਾਏ ਤੇ ਸਾਗਰ ਕੋ ਰਖਮਨ ਪਾਏ ਅ ਸ਼ਕਤੀ ਨੇ ਜਿਹੜੇ ਛੱਤੀਆ ਮਦਦ ਅਨੇਕਾਂ ਪਰਤ ਇਹ ਜੋ ਇਹ ਇਹ ਜੀਤ ਹੋ ਗਿਆ ਜਿਵੇਂ ਮੈਂ ਬੋਲਦਾ ਵੀ ਮੰਨ ਕੇ ਵੀ ਸਤਿਗੁਰੂ ਓਕਾਰਾ ਫਰਕ ਆ ਵਿਚ ਕੇ ਗੁਰਦੇ ਨੂੰ ਓਕਾਰਾ ਹੈ ਸਤਿਗੁਰੂ ਸਤਿਗੁਰੂ ਓਕਾਰ ਕੇ ਕਿਉਂ ਹਾਂ ਮੈਂ ਤਾਂ ਇਹਦਾ ਮਤਲਬ ਅੱਜ ਅੱਡ ਨਬਜ ਲੈ ਹੈ ਪਹਿਲਾਂ ਗੁਰਦੇਵ ਗਿਆਨ ਤਾਂ ਉਹਨੂੰ ਆਪ ਨੂੰ ਨਹੀਂ ਹੈ ਗੁਰਦੇਵ ਨੂੰ ਆਓ ਸਦਾ ਗਿਆਨ ਤਾਂ ਆਪ ਨੂੰ ਨਹੀਂ ਕਿ ਲੋੜ ਦੇ ਜਿਹੜੂ ਸਾਜਿਆ ਗਿਆ ਹੁੰਦਾ ਤੇ ਇੱਕ ਜਾਣ ਲਿਆ ਜੀ। ਭਾਈ ਬ੍ਰਹਮਦੇਵ ਤੋਂ ਉੱਪਰ ਦੀ ਵਸਦਾ ਸਤਿਗੁਰੂ। ਫਾਈਨਲੋਂ ਵਸਦਾ। ਗੁਰੂ ਬ੍ਰਹਮਦੇਵ ਵਸਦਾ ਸਤਿਗੁਰੂ। ਕੋਦੋਂ ਇਹ ਵੀ ਸਮਝ ਕੇ ਚੱਲਣਾ ਬਹੁਤ ਗੁਰੂ ਬ੍ਰਹਮਦੇਵ ਸਤਿਗੁਰ ਤੇ ਹੀ ਪੂਰਨ ਬ੍ਰਹਮ ਸਤਗੁਰ ਹੂੰ ਪੂਰਨ ਬ੍ਰਹਮ ਸਤਗੁਰ ਆ ਜੇ ਕੋਈ ਜਾਣਦਾ ਸਤਗੁਰ ਆ ਉਹ ਕੋਈ ਤਾਂ ਗਬੇ ਇਹਨੂੰ ਕੇ ਜਨਮੇ ਕਰਮੋਂ ਘਬਰ ਮਟਾਇਆ ਤੇ ਜਨੂ ਉਹਦਾ ਹੀ ਹੋਣਾ ਫੁਰਕੀ ਦਾ ਹੋਣਾ ਪੂਰਨ ਬ੍ਰਹਮ ਕੇ ਜਨਮ ਦੀ ਲਿਖਾ ਹੈ ਇੱਕ ਕੋਈ ਤਾਂ ਗਬੇ ਲਿਖਾ ਹੈ ਸਤਗੁਰੂ ਦੇ ਜਨਮ ਘਰ ਮਨ ਬਣਾਇਆ ਸਤਗੁਰੂ ਦੇ ਤੇ ਕੋਈ ਗੱਲ ਅੰਦਰ ਸੁਣਦੇ ਵੀ ਪੂਰਨ ਬਣ ਨਹੀਂ ਸਤਗੁਰੂ ਬਣ ਨਹੀਂ ਜਿਦਾ ਆਪਣਾ ਮਨ ਮੰਨਾਲਿਆ ਇੱਕ ਹੋ ਗਿਆ ਕੋਈ ਇਸ ਦਾ ਇਹ ਨਾ ਕੋਈ ਕਮਿਸ਼ਨ ਤੋਂ ਸਤਿਗੁਰ ਤੇ ਬਣਨਾ ਚਾਹਿਆ ਕੋਈ ਬਣ ਸਕਦਾ ਪਰ ਉਹ ਨਾਲ ਕਿੱਛੇ ਜੇ ਇਮਾਨਦਾਰੀ ਨਾਲ ਜੁੜੇ ਇਮਾਨਦਾਰੀ ਤੇ ਅੱਜ ਵੀ ਤਾਂ ਸਤਗੁਰੇ ਇਮਾਨਦਾਰੀ ਤੇ ਨਹੀਂ ਹੋਦਾ ਹੋਰ ਨਹੀਂ ਛੱਡਦਾ ਉਹ ਵੀ ਛੱਡ ਦੇ ਉਹ ਦਾ ਹੈਗੇ ਆ ਜਾਣ ਕੇ ਬਣਾਇਆ ਹੈ ਬੈਰਵਾੜਾ ਮਾਰਿਆ ਹੈ ਨੇ ਛੱਡ ਦੇ ਫੇਰੀ ਮਾਤਾ ਹੈ ਨਾ ਛੱਡ ਆਪਣੀ ਕਮੀ ਦਾ ਇਹਨੂੰ ਪਤਾ ਨਹੀਂ ਪਤਾ ਹੈ ਛੱਡਦਾ ਨਹੀਂ ਆ ਲੋਕ ਤੇ ਹੋਰ ਨਾ ਛੱਡਦਾ ਪਤਾ ਹੀ ਹੈ ਕਿ ਤੁਮਕੀ ਇਥੇ ਹੀ ਹੋ ਰਹਾ ਜਿਵੇਂ ਜਿਹੜਾ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਗਨਾਸ਼ੀ ਗੁਰਖ ਹੈ ਸਮਝ ਰਿਹਾ ਸਮਝ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਸ਼ਬਦ ਗੁਰੂ ਜੀ ਉਹ ਸਤਗੁਰੂ ਦਾ ਉਹ ਰੂਪ ਹੈ ਜਿਹੜਾ ਸ਼ਬਦ ਰੂਪ ਸਤਗੁਰ ਸ਼ਬਦ ਨੂੰ ਬੰਨ੍ਹ ਜਿਹੜਾ ਸਤਵਰ ਉਹ ਜਨਮਿਆ ਹੋਇਆ ਜਿਹੜਾ ਰੁਕਦਾ ਉਹ ਕਲਾ ਹੋਵਰੇ ਦਹਾਂ ਦੀ ਥੋੜੀ ਜਿਹੀ ਖਰੇਕ ਇੱਕ ਆਦਮੀ ਤੇ ਕਈ ਕਈ ਸਤਵਰਾਂ ਦੀ ਅੱਖ ਹੈ ਤੇ ਤਹਾਂ ਜਾ ਕੇ ਜਿਵੇਂ ਜਿਆਦਾ ਪੀ ਐਚ ਡੀ ਕਰਦਾ ਹੈ ਇੱਕ ਬੰਦੇ ਦਾ ਇੱਕ ਟੀਚਰ ਹੁੰਦਾ ਹੈ ਯੂਨੀਵਰਸਿਟੀ ਇਸ ਕੋ ਡਾਕਟਰ ਇਸ ਕੋ ਪੀ ਐਚ ਡੀ ਬੁੱਧੇ ਡਾਕਟਰੀ ਕਰਾਉਂਦਾ ਹੁੰਦਾ ਤੇ ਯੂਨੀਵਰਸਿਟੀ ਜਿਆਦਾ ਨਹੀਂ ਹੁੰਦਾ ਮੁੰਡਿਆਂ ਨੂੰ ਕੋ ਡਾਕਟਰੀ ਕਰਵਾਉਂਦਾ ਤੇ ਕੋ ਨਾ ਕਹਾਂ ਜਾ ਕੇ ਇਸ ਆਦਮੀ ਘੱਟੋ ਘੱਟ ਕਾਦਮੀ ਹਰ ਵਕਤ ਹੈ ਤੁਹਾਡੇ ਕੋਲ ਜੀਰੇ ਬਲਾਉਣਾ ਤੁਹਾਨੂੰ ਤਾਂ ਬੋਲਣਾ ਹਾਂ ਇਹ ਗੱਲ ਝੂਠੀ ਹੈ ਫਿਰ ਇਹ ਗੁੱਪਤ ਗੱਲਾਂ ਨੇ ਕਹਾਂ ਆਪ ਵੀ ਬਦਲ ਲੀ ਜਾਂਦਾ ਹੈ ਬੁਲਾਇਆ ਫਿਰ ਕੌਣ ਕੌਣ ਬੁਲਾਉਗਾ ਕੌਣ ਬੁਲਾਉਗਾ ਕੋਈ ਫਿਰ ਦੋ ਹੀ ਨੇ ਇੱਕ ਬੋਰਡਰ ਡਿਊਟੀ ਲਈ ਹੋਈ ਹੈ ਕੇ ਡਿਊਟੀ ਲਈ ਹੋਈ ਹੈ ਜਾਂ ਇਹ ਤੇ ਕੁਝ ਦੇਣ ਵਾਲੀ ਦੀ ਡਿਊਟੀ ਲਈ ਹੋਈ ਹੈ ਨਵੀ ਤੂੰ ਦੇਖੀਏ ਨੇ ਉਦੈਸ਼ਾ ਉਦੈਂ ਹੀ ਆਪਣੇ ਅਠਾਨੇ ਦਾ ਥਾਣਾ ਜਿਹੜੀ ਹੈ ਜੇ ਲੱਭੀ ਤੇ ਤਕਲੀਫ ਹੋਵੇ ਖਾਨੇ ਫੋਟੋ ਕਰੋ ਸਾਡੇ ਨਾਲ ਤੁਮ ਮਜ਼ਦੂਰੀ ਸਭ ਦੇ ਉੱਤੇ ਲੱਗੀ ਗਿਆ ਤੇ ਸਾਧਾਨ ਨਾਲ ਸਰਪੀਚੇ ਤਾਜ ਜਸਮਨ ਮੈਂ ਐਵੇਂ ਬਿਲ ਇਹ ਜਾਨੀ ਕੋਈ ਜਾਇਦਾ ਜਾਇਦਾ ਤੁਸੀਂ ਬੁੱਢੀ ਬੈਠੇ ਹੋ ਨਾ ਇਹ ਲਾਇਆ ਜਿਵੇਂ ਲਿਖਿਆ ਹੈ ਕਿੱਲਾ ਹੈ ਕਿੱਲਾ ਹੈ ਕਿੱਥੇ ਆਇਆ ਹੋਇਆ ਨਾ ਇਹ ਗੱਲਾਂ ਨੂੰ ਦਬਿਰਦਾ ਨਾ ਰਹਿਣਾ ਪਊਗਾ ਹੁਣ ਕਹਤਿਆਂ ਇਹਨਾਂ ਨੂੰ ਕੋਈ ਤਾਂ ਨਹੀਂ ਆਵੇ ਲੈ ਅਬੀ ਬਾਣੀ ਫਰੰਟ ਗਈ ਕਈਆਂ ਨੂੰ ਕਈ ਕਈ ਪਾਸੇ ਮਸਲੇ ਦੇ ਹੁਣ ਮਸਲਾ ਆਪਣੇ ਸਮਝਣ ਦਾ ਹੀ ਆ ਆਪਣੇ ਸਮਝਣ ਦਾ ਮਸਲਾ ਹੁੰਦਾ ਉਹ ਹੋ ਗਿਆ ਕੰਮ ਨਾਲ ਉਹਰ ਦਾ ਉਹੀ ਸੋਣ ਹੋ ਜਾਣਾ ਇੱਥੇ ਆ ਕੇ ਤਾਂ ਉਹਨਾਂ ਨੇ ਸੋਣੇ ਹੋ ਜਾਣਾ ਉਹ ਤਾਂ ਸੀਗਾ ਅਨ ਪਬਲਿਕ ਦੇ ਤੇ ਜਿਹੜਾ ਪਰਬਾਪਿਆ ਹੈ ਤਾਂ ਰੋਣਾ ਰਪਾਇਆ ਸੀਗਾ ਕਿ ਜੇ ਰੁਕਿਆ ਤਾਂ ਉਹ ਰੋਣਾ ਰਪਾ ਉਪਾ ਨਹੀਂ ਸਕਦੇ ਬਲਗਲਾ ਨਹੀਂ ਸਕਦੇ ਬਗਲ ਨਹੀਂ ਇਹ ਅਸਲੀ ਯੋਦੀ ਯੋਦੀ ਉਹ ਰੋਣਾ ਰੂਲਾ ਕਰਨ ਵਾਲਿਆਂ ਵਾਸਤੇ ਉਹ ਜਿਹੜੇ ਪਹਿਲੇ ਅਸਲੀ ਕਿਥੇ ਜੇ ਆਹ ਉਹਨਾਂ ਧਾਂ ਚਲੇ ਜਾਣਗੇ ਆਪਾਂ ਚੁੱਪ ਕਰ ਜਾਈਏ ਇਹ ਜਿਹੜਾ ਸਾਤੌਣਾ ਦਾ ਪੂਰਨ ਸੰਤ ਗੱਲਾਂ ਆਈਆਂ ਸੱਚ ਕਰਦੇ ਉਹ ਤੇ ਸੀ ਉਹ ਜਿਵੇਂ ਉਹ ਇਹ ਜਿਹੜੇ ਰਾੜੇ ਵਾਲੇ ਨਾ ਇਹਨੇ ਤਾਂ ਘਟ ਗਈ ਸੀ ਇਹ ਸ਼ਾਹ ਕਰਦਾ ਹੁੰਦਾ ਉਹਦੇ ਵਿੱਚ ਹੈਗਾ ਇੱਕ ਆਕਦੀ ਕਿਲੇ ਦੇ ਵਿੱਚ ਹੈ ਢੋਡਾ ਢੋਡਾ ਉਹ ਕਿਹੜਾ ਆਇਆ ਜਾਂ ਦਰਵਾਜ਼ਾ ਆਇਆ ਚੱਕ ਰਿਹਾ ਕੱਦ ਨਾਲ ਉਹ ਗਾਣਾ ਗਿਆ ਉਹ ਜੂ ਉਹ ਕਿਹੜਾ ਗੱਲਾਂ ਫਿਰ मेरा जो तेरा से जरा दरवाजा पे निकल गया साहब उधर बजा नगरिया और दा नगरो पे आ गया ना फिर समझ वो तो सामने भी आ गया लागी तू ਜਿਵੇਂ ਕਰ ਰਿਹਾ ਜੋ ਹੋ ਰਿਹਾ ਉਹ ਦੇਖਿਆ ਸੋ ਬੋਲ ਲਿਓ ਪਿੱਛੇ ਉਹ ਦੇਖ ਕੇ ਦਸਣੀ ਜਿਹਨੇ ਦੇਖ ਕੇ ਦਸਤੀ ਬਸ ਫਿਰ ਜੀਵੀ ਕਿਸੇ ਦੀ ਬਚੜੀ ਸੱਚੀ ਤਰੂਹ ਸੀ ਪ੍ਰਸਾਦਨ ਹੈ ਜੀ ਜੀ ਬਹੁਤ ਥੋੜੇ ਆਦਮੀ ਕੋਲ ਪਹੁੰਚੇ ਕੁਝ ਲੋਕ ਵੀ ਗਰੀਬੀ ਬਹੁਤ ਸੀ ਤੰਗ ਵੀ ਬਹੁਤ ਸੀ ਲੋਕ ਟਾਈ ਵੀ ਹੈ ਦੀ ਸੀ ਫਿਰ ਰੋਕ ਪੈਸੇ ਉੱਚ ਗਏ ਸੀ ਹੁਣ ਲੋ ਤੇ ਚੱਲੋ ਗਏ ਮੈਂ ਕਿਥੇ ਖੜੇ ਅਖਰ ਪਿੱਛੋਂ ਕੇ ਆਏ ਹੋਏ ਸੀ ਹਾਂ ਉਹ ਲੋ ਜੀ ਅਕਲ ਤਾਂ ਗਿਆ ਕਰਦਾ ਗਿਆ ਦੂਆ ਰਾਹ ਪਉਣ ਵਾਲਾ ਜਾਂ ਨਾ ਕੋਈ ਹੋਵੇ ਨਾ ਤੇ ਕਿਰਾਏ ਵੀ ਪੈ ਜਾਂਦੀ ਹੈ ਅਕਲ ਜੇ ਰਾਹ ਪਉਣ ਵਾਲਾ ਹੋਵੇ ਕਿਰਾਏ ਪੈ ਜਾਂਦੀ ਹੈ ਰਾਹ ਪਉਣ ਵਾਲਾ ਕੋਈ ਸੀ ਕਿਰਾਏ ਪੈ ਗਈ ਆ ਮੁੰਡੇ ਨੇ ਸਾਰੇ ਤੇ ਜਿੰਮੇ ਲਾ ਕੇ ਹਵਾ ਹੀ ਚੱਲ ਬਈ ਹਵਾ ਹੀ ਚੱਲ ਬਈ ਇੱਕ ਉਹ ਜਿਵੇਂ ਆਪਾਂ ਬੰਨੋ ਆਗ ਲਾ ਕੇ ਜੰਦੇ ਫੇਰ ਆਪਾਂ ਕਿੰਨੇ ਸਾਲ ਆਪਾਂ 10 ਮਿੰਟ ਬੜੇ ਜਦੋਂ ਫੇਰ ਛੱਡਦਾ ਫੇਰ ਆਜ ਲਗੇ ਹੋਣਾ ਫੇਰ 10 ਮਿੰਟ ਅਵਤਾਰ ਕਰੇ ਹੁਣ ਉੱਥੇ ਫੇਰ ਫੇਰ ਇੱਥੇ ਆਏ ਵਾਪਸ ਹੋ ਗਏ ਜਿਵੇਂ ਜਿਵੇਂ ਇਹ ਤਾਂ ਮਤੋਂ ਜਲਦੀ ਰਕਾਬ ਹੋ ਜਾਂਦੀ ਆ ਸਾਡਾ ਵੀ ਦੇਸ਼ ਘੱਟਾ ਹੈ ਤਾਂ ਤੁਹਾਡਾ ਵੀ ਹੋ ਜਾਂਦਾ ਜਦੋਂ ਹੋਣਾ ਬੰਦ ਹੋਣਾ ਸਾਨੂੰ ਪਤਾ ਲੱਗ ਜਾਣਾ ਬੜਾ ਅਜੀਬਾ ਦਾ ਸਤਾ ਪਿਆ ਲੱਗਦਾ ਜਦੋਂ ਕੋਈ ਪੈਸਾ ਨਹੀਂ ਚੱਲਦਾ ਚਾ ਚਾਲ ਮੀਨਾਂ ਲੜਾਈ ਨਹੀਂ ਕੀਤੀ ਬਸ ਪੰਜ ਮਿੰਟ ਜਦੋਂ ਕਰਦੇ 40 ਪੈਸੇ ਸੀ ਕੁਛ ਨਹੀਂ ਸੀ ਤਰੀਕੇ ਨਾਲ ਹੋਊਗੀ ਮੈਂ ਕਿਹਾ ਕਿ ਉਹ ਕਰਨ ਆਉਣੇ ਏੜੇ ਪੈਸੇ ਨਮਕੀ ਸੋ ਉਹ ਹੀ ਸੁਣੀ ਚਲੋ ਜਿਹੜੀ ਆਈ ਵੀਰਾਂ ਆ ਵੀਰ ਇਹ ਕਿ ਸੁਣੀ ਜੋ ਹੁਣ ਉਹ ਹੈ ਗੱਲ ਇਹ ਉਹ ਤੋਂ ਘਾਨ ਹੋਗੀ ਸੁਰੂ ਤੋਂ ਚੱਕੀ ਗਈ ਪਿੱਛੇ ਚਾਈਡ ਕਰਦੀ ਹੋਰਾਂ ਇਹ ਗਾ ਵੀ ਜਿਹੜੇ ਲੋਕ ਨੇ ਇਹਨਾਂ ਨੂੰ ਅੰਧ ਸੈਤਰੀ ਉਡਕਤਾਂ ਕੀ ਜਾਈ ਕੋਈ ਨਹੀਂ ਦੇ ਜਾਣੀ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨਹੀਂ ਸੁਣੌਣਾ ਤੂੰ ਇਹਨਾਂ ਨੂੰ ਗਾਹਾਂ ਦਾ ਕੋਰਸ ਦੋ ਅਗਲੀ ਕਲਾਸ ਵਾਲਾ ਥੱਲੇ ਵਾਲੀ ਸੁਣ ਕਲਾਸ ਬਦਲ ਨਹੀਂ ਗਈ ਜਦੋਂ ਵਾਦਾ ਸਮਝ ਆ ਗਈ ਗਾਹਾਂ ਬਦਲੋ ਗਾਣੇ ਸਭ ਕਰ ਜੀ ਗਾਹਾਂ ਬਦਲੋ ਇਹ ਗੱਲ ਹੈ ਤੁਸੀਂ ਛੱਪਣੇ ਦਿੱਤਾ ਖੰਡਾ ਵੀ ਲਿਖਿਆ ਗਿਆ ਸੁਖਮੀ ਸਾਹਿਬ ਦਾ ਤੁਸੀਂ ਕਿਹਾ ਵੀ ਨਹੀਂ ਜਿਹੜੇ ਬੀਚ ਕੇ ਪੈ ਗਿਆ ਸਾਈਡ ਤੇ ਹਾਂ ਸੁਖਮੀ ਜੀ ਦਾ ਖੰਡਾ ਪਿਆ ਜੀ ਮੈਨੂੰ ਉਹ ਤਾਂ ਨਾ ਨਾ ਨਾ ਤਿਆਰ ਹੈ ਸੁਖਮੀ ਸਾਹਿਬ ਦਾ ਗੱਲ ਕੀਤੀ ਹੈ ਪਤਾ ਨਹੀਂ ਲੱਗਦਾ ਗੱਲ ਕੀਤੀ ਹੈ ਸੌਖਿਆ ਜਾਂ ਸਵਾਰ ਹੁੰਦਾ ਕੱਲ ਵੀ ਕਿੰਨੇ ਸੌਖੇ ਕੋਈ ਲੱਭ ਜਾਏ ਤੇ ਉਹ ਉਸੇ ਕਾਫਰ ਬਕਾਰ ਕੋ ਤਾਂ ਅਵੇਲੇ ਲੈ ਲਉ ਹਾਂ ਪਰ ਬੜੀ ਬੜੀ ਕਾਜ ਕੋ ਤਾਂ ਬ੍ਰੀਡ ਦਾ ਪ੍ਰੋਡਕਟ ਹੈ ਹਾਂ ਇਹ ਤਾਂ ਜਰੂਰ ਦੇ ਵੱਡੀ ਹੈਗੀ ਉਹ ਜਿਹੜਾ ਅੰਮ੍ਰਿਤੋ ਦਾ ਸ਼ੋਗ ਹੈ ਉਹ ਜਿਹੜੇ ਸਭ ਤੋਂ ਪਿੱਛੇ ਦੇ ਜਿਹੜਾ ਕੋਸੀਨ ਵਿੱਚ ਅੰਦਰ ਰਹਿੰਦੇ ਨੇ ਉਹ ਜਿਹੜੇ ਨਾਲ ਸ਼੍ਰੀ ਗੁਰਦੇਵ ਜੀ ਸ਼੍ਰੀ ਨਾ ਗੁਰਦੇਵ ਨਾਲ ਡਿਗਰੀ ਲੱਗੀ ਕੋ ਜਿਵੇਂ ਗੁਰਨਾ ਸਤਗੁਰ ਲੱਗਿਆ ਉਹ ਗੁਰਦੇਵ ਨੇ ਸ਼੍ਰੀ ਲੱਗਿਆ ਸ੍ਰੀ ਦੇ ਬਣਾਨੇ ਬੋਲਦਾ ਮੋੜੇ ਜਰ ਲਬਜੇ ਦੋਨੇ ਦਾ ਮਤਲਬ ਉਹਦੇ ਅਰਥ ਵੀ ਦੋ ਦੱਜੂਗਾ ਉਹ ਬੁਲਾਇਆ ਬੋਦਾ ਸ੍ਰੀ ਦੀ ਲੋੜ ਹੈ ਸ੍ਰੀ ਦਾ ਹੈ ਸ੍ਰੇਸ਼ ਸ੍ਰੀ ਦਾ ਮਤ ਸ੍ਰੇਸ਼ ਤੋਂ ਪਹੁੰਚੋ ਸ੍ਰੇਸ਼ ਜਿਹੜੇ ਗੁਰਦੇਵ ਨੇ ਹਾਂ ਉਹਦੇ ਬਾਪੇ ਨੇ ਦੇਕਿਆ ਗੁਰਦਾ ਜਾਨੀ ਸਭ ਤੋਂ શ્રેષ્ઠ ਜਿਹੜੀ ਪਦਵੀ ਆ ਗੁਰਦੇਵ ਦੀ ਸ੍ਰੀ ਚੌਥੀ ਸਟੇਜ ਤੇ ਆਇਆ ਹੈ ਤੁਰਿਆ ਬਾਦ ਆਇਆ ਹੈ ਜਿਹੜੇ ਮੈਂ ਸਿੱਧੇ ਜਗਤ ਦੇ ਵਿੱਚ ਵਿਆਪਦੇ ਨੇ ਉਹ ਆਦ ਗੁਰੇ ਜੀ ਗੁਰੇ ਸਤ ਸ੍ਰੀ ਗੁਰਦੇਵ ਉਹ ਪੰਜ ਪਾਸ਼ਾ ਨੇ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਰਾਜਾ ਉੱਥੇ ਕੱਲਾ ਗੁਰਦੇਵ ਸ੍ਰੀ ਗੁਰਦੇਵ ਹੈ ਨਹੀਂ ਉੱਥੇ ਹਾਂ ਉਹ ਮਾਣੇ ਹੈ ਗੁਰਦੇਵ ਮੈਂ ਦੱਸੀਦਾ ਜਾਣਾ ਵੀ ਉਹਨਾਂ ਕਹਾਣ ਉਹ ਜਿਹੜੀ ਥੋੜੀ ਬਾਪ ਨਖਰੀ ਹੈ ਉਹ ਤਾਂ ਕਹਾ ਆਵੇ ਬੋੜੀ ਬਾਪਾ ਨੇ ਥਰੀ ਕਿ ਜਾਣ ਲਿਆ ਉਦੋਂ ਦੀ ਗੱਲ ਗਾਹਣੇ ਹੁਣਾ ਨਾ ਉਹ ਪਿਛੇ ਤੂੰ ਹਾਂ ਤੇ ਪਿਛੇ ਆਇਆ ਹਾਂ ਪਿਛੇ ਆਇਆ ਪਿਛੇ ਹੈ ਤੂੰ ਯਾਦ ਇੱਕ ਜਾਣ ਲਿਆ ਉਹ ਤਾਂ ਬਾਤ ਦੀ ਗੱਲ ਆ